ਸੋਇ ਜਾਂ ਮਾਰ ਕਹਤਾ ਹੈ ਕਿ ਤੋ ਮੁਸਲੀ ਹਰ ਬਾਂਸੀ ਵਜਾਈ ਨਾ ਕਹਿ ਕਛ ਖੇਤ ਮਰਿਓ ਕੁ ਕਹਿ ਜਨ ਰੀਜ ਬਬੀਛਨ ਦੀਨ ਸੋਲੰਕਾ ਜਾ ਲਖਿਓ ਕੁਬ ਜਾ ਬਲਬਾਨ ਜਾ ਲਖਿਓ ਮੁਰਦੈ ਤ ਅਤੰਕਾ ਰੀਜ ਬਜਾਇ ਉਠਿਓ ਮੁਰਲੀ ਸੋ ਜੀਤ ਦਿਓ ਜਸ ਕੋ ਮਨੋ ਡੰਕਾ ਰੂਖਨ ਤੇ ਰਸ ਚੂਮਨ ਲਾਗ ਚਰੈ ਚਰਨਾ ਗਿਰਤੇ ਸੁਖਦਾਈ ਕਹਾਸ ਚੁਗੈ ਨਾ ਮਿਗਾ ਰਿਗਾ ਕੇ ਖਗ ਰੀਜ ਰਹੇ ਤੁਨ ਜਾ ਸੁਨ ਪਾਈ ਦੇਵ ਗੰਧਾਰ ਬਿਲਾਵਨ ਸਾring ਕੀ ਰਿਜ ਕੈ ਜੇ ਤਾਨ ਵਸਾਈ ਦੇਵ ਸਭਾ ਅਮਰ ਦੇਖਤ ਕਉ ਤਕ ਜਾਓ ਮੁਰਲੀ ਨਦ ਲਾਲ ਵਜਾਈ ਸੋਇਆ ਠਾੜ ਰਹੀ ਜਮਨਾ ਸੁਨ ਕੈ ਤੁਨ ਰਾਗ ਭਲੇ ਸੁਨ ਕੋ ਹੈ मोहे रहे बनके गज आव मिल आवत सिंह सहे है आवत है सुर मंडल के सुर त्याग सब है सुर सुन सुन बनके खगवा तर ऊपर पंख पसार रहे है जोग वारन खेलत है हर सो अति हित कह न कछु धन में अति सुंदर पै जे बीज लसै फन कंचन की सो प्रवा तन में ਜੋ ਚੰਦਰਮੁਖੀ ਕਟਕੇ ਹਰ ਸੀ ਸੋ ਬਰਾਜਤ ਗਵਾਰਨ ਕੇ ਮੈ ਸੁਨ ਕੈ ਮੁਰਲੀ ਤੁਨ ਸਰਉਨਨੁ ਮੈਂ ਅਤ ਰੀਤ ਗਿਰੀ ਸੋ ਮਨੋ ਪਨਮੈ ਏ ਕੌਤਕ ਕੈ ਸੋ ਚਲੇ ਗ੍ਰਹਿ ਕੋ ਫੁਨ ਗਾਵਦ ਗੀਤ ਹਲੀ ਹਰਿਆਛੇ सुंदर बीच अखारे के दो कब श्याम कहे नटुआ जन काछे राजत है बलभद्र के नैन, यो मानो टरे मैन के साछे सुंदर है रद के पद तए अति मानौ डारत मै नहि पाछे बीच मनए सुख पाए तव गृह को सुचले रिप को हन दो चंद्र प्रभाज सम जा मुख उपम जा सा है न कोऊ ਦੇਖਦ ਰੀਜ ਰਹਿ ਜਿਹ ਕੋ ਰਿਪਰੀਜਿਤ ਸੋਇਨ ਦੇਖਦ ਸੋਉ ਮਾਨਵ ਲਛਮਨ ਰਾਮ ਬੜੇ ਮਾਰ ਚਲੇ ਰਿਪ ਕੋ ਘਰਿਉ ਅਥ ਕੁੰਜ ਗਲੀਨ ਕੋ ਖੇਰ ਬੋ ਸੋਇਆ ਹਰ ਸੰਗ ਕਹਿ ਹੋ ਕੇ ਅਬ ਕੁੰਜ ਗਲੀਨ ਮੈਂ ਖੇਲ ਮਚਈਐ ਨਾਚਦ ਖੇਰਦ ਪਾਂਤ ਪਲੀ ਸੋ ਕਹਿ ਹੋ ਸੁੰਦਰ ਗੀਤ ਬਸਈਐ ਜਾਕੇ ਕੀਏ ਮਨਹੋਤ ਖੁਸੀ ਸੁਨੀਐ ਉਠਕੇ ਸੋਉ ਕਾਰਜ ਕਈਐ ਪੀਰ ਨਦੀ ਹਮਰੀ ਸਖ ਲੈ ਸੁਖ ਆਪਨ ਦੇ ਹਮੂ ਸੁਖ ਦਈਐ ਕਾਨ ਕੋ ਆਏ ਸਮਾਂੰਤਰੀਆ ਅੰਬ੍ਰਿਤ ਗਲੀਨ ਮੈਂ ਖੇਲ ਮਚਾਇਓ ਗਾਇ ਉਠੀ ਸੋਈ ਗੀਤ ਭਲੀ ਬਿਦਜੋ ਹਰਖੇ ਮਨ ਪੀ ਤਰਪਾਇਓ ਦੇਵ ਗੰਧਾਰੋ ਸੁਧ ਮਲਾਰ ਬਿਖੈ ਸੋ ਉਪਾਖ ਖਿਆਲ ਬਸਾਇਓ ਰੀਜ ਰਹੋ ਪੁਰ ਮੰਡਲੋ ਸੁਰ ਮੰਡਲ ਪੈ ਤਿਨ ਹੂ ਸੁਨ ਪਾਇਓ ਕਾਨ ਕਯੋ ਸਿਰ ਪੈ ਧਰ ਕੈ ਮਿਲ ਕੁੰਜਿ ਨ ਮੈਂ ਸੁਭ ਪਾਂਥ ਗਈ ਹੈ ਕੰਜ ਮੁਖੀ ਤਨ ਕੰਜਨ ਸੇ ਸਭ ਰੂਪ ਬਿਖੈ ਮਨੋ ਮੈਨ ਮਈ ਹੈ ਖੇਲ ਬਿਖੈ ਰਸਤੀ ਸੋ ਤ੍ਰਿਆ ਸਭ ਸਿਆਮ ਕੇ ਆਗੇ ਹਵੈ ਐਸੇ ਧਈ ਹੈ ਯੋ ਕਵ ਸਿਆਮ ਕਹੇ ਉਪਮਾ ਗਜ ਗਾਮਨ ਕਾਮ ਨਿਰੂਪ ਭਈ ਹੈ ਸੋਈਆ ਕਾਨ ਛਯੋ ਚਹ ਗਵਾਰ ਨਸਖੋ ਸੋ ਭਾਗ ਚਲੈ ਨਹੀਂ ਦੇ ਸੁਹਾਈ जो मृगनी अपने पद को रथ ਸਮੈ समय नहीं देत मिलाई कुंजन पीतर तीर नदी बृख ਸੋ सुता सो फिरै ताह धाई ठौर ਸਿਆਮ कवि ਏ कह ए भांसो श्याम जो खेल मचाई रात करी छठ मासन की अति उज्जवल भै सो अर्ध अंधेरी पाही समय तेठौर विखाय कवि श्याम सवै करि क्वारन घेरी नयन की कोर कटाचन पेखत चूम गिरी ਇਕ ਹਵਾ ਗਈ ਚੇਰੀ ਯੋ ਉਪਜੀ ਉਪਮਾ ਜੀਵੈ ਸਰਸੋਂ ਮ੍ਰਿਗਨੀ ਜਿਮ ਘਾਵਤ 헤ਰੀ ਫੇਰ ਉਠਾ ਉਠਤੇ ਹੀ ਪਗਾਇ ਜਦਰਾ ਰਾ ਕੋ ਨਾ ਘਾਰਨ ਪਾਛੈ ਪਰੈ ਤਿਨ ਕੇ ਹਰ ਜੂ ਚੜਕੈ ਰਸ ਕੈ ਹਏ ਉਪਰ ਧਾਈ ਰਾਦੇ ਕੋ ਨੈਨਨ ਕੇ ਸਰ ਸੰਗ ਮਨੋ ਭਉ ਹੁ ਚੜਾਈ ਝੂਮ ਗਿਰੇ ਧਰਨੀ ਪਰ ਸੋ ਮ੍ਰਿਗਨੀ ਮ੍ਰਿਗਹਾ ਮਨੋ ਮਾਰ ਗਿرائی ਸੋਧ ਲੈ ਬ੍ਰਿਖ ਭਾਣ ਸੁਤਾ ਤਵਹੀ ਹਰ ਅਗਰੇ ਦੀ ਕੁੰਜਨ ਮੈਂ ਉਟ ਭਾਗੈ ਰਸ ਸੋ ਜਦ ਰਾਏ ਮਹਾਰਸਿ ਆ ਤਵਹੀ ਤਿਹਕੇ ਪਿਛੂ ਆਨ ਇਹ ਕੌਤਕ ਜੋ ਅਨੁਰਾਗੈ ਯੋ ਉਪਜੈ ਉਪਵਾਮਨ ਮੈਂ ਮ੍ਰਿਗਨੀ ਜਿਮ ਘਾਇਲ ਸਵਾਰ ਕੇ ਆਗੈ ਸੋ ਯਾ ਅਤੀ ਕੁੰਜ ਗਲੀਨ ਬਿਖੈ ਬ੍ਰਿਖ ਸੁਤਾ ਕੋ ਹਰ ਐਸੇ ਕਯਾ ਦਉਨ ਵਾਇ ਤੋ ਆਏ ਮਾ ਜਮਨਾ ਟਟ ਮਾਨਕ ਜੈਸੇ ਪੈ ਚੜਕੇ ਰਸ ਹੈ ਮਨ ਨੈਨਨ ਭੋਤ ਨਾਇਕ ਐ ਮਾਰਤ ਲੈਸੇ ਯੋ ਉਪਜੀ ਉਪਮਾ ਜਿਮ ਸਵਾਰ ਮਨੋ ਜਿਤ ਲੇਤ ਮਿਰਗੀ ਕਹ ਤੈਸੇ ਗਹਿ ਕੈ ਬ੍ਰਿਘਪਾਣ ਸੁਤਾ ਜਦ ਜੂ ਗੋਣਤ ਤਾ ਸੰਗ ਅੰਮ੍ਰਿਤ ਬਾਣੀ ਭਾਗਤ ਕਹੇ ਕੇ ਹੇ ਸੁਨੋ ਹਮ ਹੂ ਤੇ ਤੂੰ ਕਿਉ ਸੁਨ ਗਵਾਰ ਨਾਰਾਣੀ ਕਾਂਜ ਮੁਖੀ ਤਨ ਕੰਚਨ ਸੇ ਹਮ ਤਵੈ ਮਨ ਕੀ ਸਭ ਬਾਤ ਪਛਾਨੀ ਸ਼ਿਆਮ ਕੇ ਪ੍ਰੇਮ ਛਕੀ ਮਨ ਸੁੰਦਰ ਹਵੇ ਬਨ ਖੋਜਿਤ ਸ਼ਿਆਮ دیਵਾਨੀ ਬ੍ਰਿਖ ਭਾਨ ਸੁਤਾ ਪਿਖ ਗਵਾਰ ਮਨ ਕੋ ਨਹਿਰਾਏ ਕਹਿ ਨੀਚੇ ਰਹੀ ਅੱਖੀਆਂ ਮਨੋ ਯਾ ਮ੍ਰਿਗ ਭਾ ਸਭ ਛੀਨ ਲਈ ਕੇ ਮਨੋ ਇਹ ਕੰਜਨ ਕੀ ਪਖੀਆਂ ਸਮ ਅੰਮ੍ਰਿਤ ਕੀ ਹਸ ਕੇ ਤ੍ਰਿਆ ਯੋ ਬਤਿਆ ਹਰ ਕੇ ਸੰਗ ਹੈ ਅੱਖੀਆਂ ਹਰ ਛਾੜਦਾ ਮੋਹੇ ਕਹਿਓ ਹਮ ਕਉ ਸੁਨਿਹਾਰਤ ਹੈ ਸਭੀ ਸਕੀਆਂ ਸੁਨ ਕਹਿ ਹਰ ਗਵਰਨ ਕੀ ਪਤਿਆ ਇਹ ਭਾਂਤ ਕਹਿਓ ਨਹੀਂ ਛੋੜਤ ਤੋ ਕਉ ਦੇਖਤ ਹੈ ਤੋ ਕਾ ਭੈਓ ਗਵਰਨ ਪੈ ਇਨ ਤੇ ਕਛ ਸੰਕ ਨਾ ਮੋ ਕਉ ਔ ਹਮਰੀ ਰਸ ਖੇਲਨ ਕੀ ਇਹ ਠੌਰ ਵਿਖੈ ਕੀ ਨਹੀਂ ਸੁਧ ਲੋਕ ਕਉ ਕਾਹੇ ਕਉ ਸੋ ਵਿਵਾਦ ਕਰੈ ਸੋ ਡਰੈ ਇਨ ਤੇ ਬਿਨ ਹੀ ਸੋ ਤੂ ਟੂ ਕਉ ਸਵੇਇਆ ਸੁਨ ਕੈ ਜਦ ਰਾਇ ਕੀ ਬਾਤ ਤ੍ਰਿਆ ਬਤੀਆਂ ਹਰ ਕੇ ਯਮ ਸੰਗ ਉਚਾਰੀ ਚਾਂਦਨੀ ਰਾਤ ਰਹੀ ਛਕ ਕੈ ਦੀਜੀਐ ਹਰ ਹੂ ਮਨ ਰਹਿਨ ਅੰਧਿਆਰੀ ਸੁਨ ਕੇ ਹਮ ਹੂ ਤੁਮਰੀ ਬਤੀਆਂ ਆਪਣੇ ਮਨ ਮੈਂ ਇਹ ਭਾਂਤ ਵਿਚਾਰੀ ਸੰਕ ਕਰੋ ਨਹੀਂ ਗਵਾਰਨ ਕੀ ਸੋਵਨੋ ਤੁਮ ਲਾਜ ਵਿਦਾ ਕਰ ਡਾਰੀ ਪਾਕਤ ਹੋ ਬਤੀਆਂ ਹਮ ਸੋ ਹਸ ਕੈ ਹਰ ਕੈ ਅਤਿ ਇਤ ਧਾਰੋ ਮੁਸਕਾਤ ਗੈ ਗਵਾਰਨ 헤 ਰੂਤਾ ਪਿਖ ਕਹਿ ਹਮ ਰੋਜ ਇਹ ਕਉ ਤਿਸਾਰੋ ਛੋਰਦਾ ਕਾਨ ਕਹਿਓ ਆਪਣੇ ਮਨ ਬੁੱਧ ਅਕਾਮ ਕੀ ਧਾਰੋ ਤਾਹੀ ਤੇ ਤੋ ਸੰਭੋਸ ਕਹੋ ਜਦ ਸਜਨੀ ਲਗਰਾ ਕਹਉ ਛੋਰਤ ਜਾਤ ਬੱਗੀ ਕਉ ਤਾਤ ਕੀ ਸਿਆਮ ਸੁਨੀ ਤ ਕਥਾ ਬਿਰਹੀ ਨਹ ਪ੍ਰੀਤ ਲਗੀ ਕਉ ਛੋਰਤ ਹੈ ਸੋ ਨਹੀਂ ਕੁਟਵਾਰ किदो कहकै पुरहु की ठगी को ताते न छोर्त हो तुम को के सुनयो कहूं छोर्त सिंह मृगी को कहि बतिया ए के संग जो थी अद जो के रस पीनी चंद्र भगा अर गुआर नृत्य अति रूप के बीच ती जो नवीनी ज्यों मृगराज मृगी को गहै कबन उपमा विद्या लखनीनी ਕਾਨ ਤਵੈ ਕਰਵਾ ਗਹਿ ਕੈ ਆਪਣੇ ਬਲ ਸੰਗ ਸੋ ਬਸਕੀਨੀ ਸੋਈਆ ਕਰ ਕੈ ਬਸ ਵਾਸ ਸੰਗ ਐਸੀ ਕਹੀ ਕਬ ਸਿਆਮ ਕਹ ਜਦ ਰਾਏ ਕਹਾਣੀ ਪੈ ਰਸ ਰੀਤਾ ਕੀ ਅਤਹੀ ਜੋ ਹੁਤੀ ਸੰਮਨੋ ਅੰਮ੍ਰਿਤ ਬਾਣੀ ਤੇਰੋ ਕਹਾ ਬਿਗਰੈ ਬ੍ਰਿਜ ਨਾਰੇ ਕਹੋ ਇਹ ਸਿਆਮ ਗੁਮਾਨੀ ਔਰ ਸਵੈ ਦ੍ਰਿਏ ਹੈ ਬ੍ਰਿਖ ਭਾਨ ਸੁਤਾ ਤਿਨ ਮੈਂ ਹੈ ਤੂ ਰਾਣੀ ਜਾ ਚੰਦ ਕੀ ਚਾਂਦਨੀ ਛਾਜਤ ਹੈ ਜਹ ਬਾਤ ਚ ਮੇਲੀ ਕੇ ਸੇਜ ਦਹੀ ਹੈ ਛੇਤ ਜਹਾ ਗੁਲ ਰਾਜਤ ਹੈ ਜਿਹ ਕੇ ਜਮੁਨਾ ਟਿਗ ਆਏ ਬਹੀ ਹੈ ਤਾਹੀ ਸਮੈ ਹਰ ਰਾਦੇ ਗ੍ਰਸੀ ਉਪਮਾ ਤਿਹ ਕੀ ਕਲ ਸ਼ਾਮ ਕਹੀ ਹੈ ਛੇਤ ਤ੍ਰਿਆ ਤਨ ਸ਼ਾਮ ਹਰੀ ਮਨੁ ਸੂਮ ਕਲਾ ਇਹ ਰਾਗਹੀ ਹੈ ਤਿਹ ਕੋ ਹਰ ਜੂ ਫਿਰ ਛੋਰ ਦਇਓ ਸੋ ਕੁੰਜ ਗਲੀ ਕਹਿ ਬਖੈ ਪਨ ਮੈਂ ਫਿਰ ਗੁਵਾਰਨ ਮੈਂ ਸੋ ਜਾਏ ਮਿਲੀ ਅਤਿਆਨ ਦੇ ਕੈ ਆਪਣੇ ਤਨ ਮੈਂ ਅਤਿਤਾ ਛਵ ਕੀ ਉਪਮਾ ਹੈ ਕਹੀ ਉਪਜੀ ਜੋ ਕੋ ਕਬ ਕੈ ਮਨ ਮੈਂ ਮਨੋਕੇ ਹਰਤੇ ਛਟੁਆਏ ਮਿਲੀ ਮ੍ਰਿਗਨੀ ਕੋ ਮਨੋ ਮ੍ਰਿਗਿਆ ਬਨ ਮੈਂ ਫਿਰ ਜਾਏ ਕੈ ਗੁਵਾਰਨ ਮੈਂ ਹਰ ਜੂ ਅਤਹੀ ਇੱਕ ਸੁੰਦਰ ਖੇਲ ਮਚਾਇਓ ਚੰਦਰ ਭਗਾ ਹੂ ਕੇ ਹਾਥ ਬੈ ਹਾਥ ਧਰਿਓ ਅਤਹੀ ਮਨ ਮੈਂ ਸੁਖ ਪਾਇਓ ਗਾਵਤ गुआरन ਹੈ सब गीत जो उन के मन पी तृपायो श्याम कह मन आनंद कह मन को पुनु शोक सब बिसरायो स्वैया हरनाथ त नाचत गुआरन मैं हसि चंद्र पगा हो कि ओर निहारयो सो सोऊ हसी इत्त ते ए हसे जजरत सो वचना है उचारयो मेरो आनतिया संग हेत करयो हम ऊपर ते हरि हेत बिसारयो हरि राज का आनन देखती अपने मन में ए पां तु जा रयो श्याम पै बस और त्रिया तेते अति ते पै मनसा नहीं धारयो आनंद थो जितनो मन में तितनो ए भाख विदा कर डारयो चंद्र पगा मुख चंद तु तय सब वारन के घट मोहे विचारयो कह कह ए भात सो तब ही अपने मन में ए बात बेचारी प्रीत करी हरिया नह सो तज खेल सबे उठ तांब सिधारी ऐस करी गिनती मन में उपमाते की कह श्याम उचारी त्रियन बीज चलेगी कथा वृक्ष भाण सुता प्रद्यनाथ विसारी अथ राजका को मान कथनम सोइया हे पांत चली कै कह सो त्रिया कव श्याम कह सो कुंज गली है चांदमुखी तन कंचन के सम ग्वर्ण ते जो खूब भली है मार की ओ निखरी तिन ते मृगनी सी मनोज सो बिनाही अली है यों उपजी उमा मन में पाति सो रति मान न रूठ चली है ਇਤਤਿ ਹਰੀਖੇਰ ਦਰਾਸ ਵਿਖੇ ਅਮ੍ਰਿਕ ਭਾਣ ਸੁਤਾ ਕਰ ਪ੍ਰੀਤ ਨਿਹਾਰੀ ਵੇਖ ਰਹਿਓ ਨਾ ਪੀਗੀ ਤਿਨ ਮੈਂ ਕਬ ਸ਼ਾਮ ਕਹੈ ਜੋਤੀ ਸੋ ਪਿਆਰੀ ਚੰਦਰ ਪ੍ਰਵਾਹ ਸਮ ਜਾ ਮੁਖ ਹੈ ਤਨ ਸੋ ਅਤਿ ਸੁੰਦਰ ਨਾਰੀ ਕਹਿ ਗ੍ਰਹਿ ਮਾਨ ਕਹਿ ਨੀਂਦ ਗਈ ਕੇ ਕੋ ਉਨਮਾਨ ਕੀ ਬਾਤ ਵਿਚਾਰੀ ਖਾਨ ਬਾਜ ਸੋਈਆ ਵੇਜ ਛਟਾ ਜੇ ਨਾਮ ਸਗੀ ਕੋ ਹੈ ਸੋ ਸਗੀ ਜਦ ਬੁਲਾਈ ਅੰਗ ਪ੍ਰਵਾਦੇ ਕੰਚਨ ਸੀ ਜੇ ਤੇ ਮੁਖ ਚੰਦ ਛਟਾ ਛਭ ਪਾਈ ਤਾ ਸੰਗ ਐਸੇ ਕਹੋ ਹਰ ਜੂ ਸੁਨ ਤੂੰ ਬ੍ਰਿਖ ਭਾਨ ਸੁਤਾ ਪਹਿ ਜਾਈ ਪਾਇਨ ਪੈ ਬਿੰਤੀਆਂ ਕਹਿ ਆਤ ਹੀਤ ਕੇ ਭਾਵ ਸੋ ਲਿਆਉ ਮਨਾਈ ਜਦ ਕੀ ਸੋ ਸੁਨ ਕਹਿ ਬਤਿਆ ਬ੍ਰਿਖ ਭਾਨ ਸੁਤਾ ਜੋ ਬਾਲ ਭਲੀ ਹੈ ਰੂਪ ਮਨੋ ਸਮ ਸੁੰਦਰ ਮੈਨ ਕੇ ਮਨੋ ਸੁੰਦਰ ਕੰਜ ਕਲੀ ਹੈ ਤਾਕੇ ਮਨਾਏ ਬੇਕਾ ਚਲੀ ਹਰ ਕੋ ਹੁਣ ਆਇ ਸੁਪਾਏ ਅਲੀ ਹੈ ਯੂੰ ਉਪਜੀ ਜੀ ਮੈਂ ਉਕਮਾਂ ਕਰਤੇ ਚਕੀ ਮਨੋ ਛੂਟ ਚਲੀ ਹੈ ਸਖੀ ਬਾਜ ਸੁਈਆ ਵਿੱਜ ਨਾਮ ਸਖੀ ਕੋ ਸੋ ਬ੍ਰਿਜ ਸੁਤਾ ਪਹਿ ਆਏ ਕਹਿ ਸੁੰਦਰ ਐਸੇ ਕਹਿਓ ਸੁਨ ਤੂੰ ਰੀਤਰੀਆ ਬ੍ਰਿਜਨਾਥ ਬੁਲਾਈ ਕੋ ਬ੍ਰਿਜਨਾਥ ਕਹਿਓ ਬ੍ਰਿਜਨਾਰ ਸੋ ਕੂ ਕਨਈਆ ਕੌਣ ਕਨਾਈ ਖੇਲੋ ਤਾਈ ਤ੍ਰਿਆ ਸੰਗ ਲਾਲਨੀ ਕੋ ਜੇ ਕੇ ਸੰਗ ਪ੍ਰੀਤ ਲਗਾਈ ਸਜਣੀ ਨੰਦ ਲਾਲ ਬੁਲਾਵਤ ਹੈ ਆਪਣੇ ਮਨ ਮੈਂ ਹਟ ਰੰਚ ਨਾ ਕੀਜੈ ਆਈ ਹੈ ਹਉ ਚਲ ਕਹਿ ਤੂੰ ਪਹਿ ਤਿਹ ਤੇ ਸੋ ਕਹੋ ਅਬ ਮਾਨ ਹੀ ਚਲੋ ਜਦੁ ਕੇ ਪਾਸ ਕਛੂ ਤੁਮ ਇਹ ਤੇ ਨਹੀਂ ਛੀਜੈ ਤਾਈ ਤੇ ਬਾਤ ਕਹੋ ਤੁਮ ਸੁਖ ਆਪਨ ਲੈ ਸੁਖ ਔਰ ਨੰਗੀਜੈ ਤਾਤੇ ਕਰੋ ਨਹੀਂ ਮਾਨ ਸਕੀ ਉਠ ਬੇਕ ਚਲੋ ਸਿਗਮਾਨ ਹਮਾਰੀ ਮੁਰਲੀ ਜਿਹ ਕਾਨ ਬਜਾਵਤ ਹੈ ਬਾਸਹਿ ਤਹ ਗਵਾਰਨ ਸੁੰਦਰ ਗਾਰੀ ਤਾਹੀ ਤੇ ਤੋਸੋ ਕਹੋ ਚਲੀਐ ਕਛ ਸੰਕ ਕਰੋ ਨ ਮਨੈ ਬ੍ਰਿਜਨਾਰੀ ਪਾਇਨ ਤੋਰੇ ਪਰੋ ਤਜ ਸੰਕ ਨ ਚਲੋ ਹਰੀ ਹਾਰੀ ਸੰਕ ਕਛੂ ਨਾ ਕਰੋ ਮਨ ਮੈਂ ਤਜ ਸੰਕ ਨ ਚਲੋ ਸੁਨ ਤੇਰੇ ਮੈਂ ਪ੍ਰੀਤ ਮਹਾ ਹਰ ਕੀ ਤਿਹ ਤੇ ਹੋ ਕਹੋ ਤੋਏ ਸੰਗ ਗੁਮਾਨਨੀ ਨੈਣ ਬਣੇ ਤੁਮਰੇ ਸਰ ਸੇ ਸੋ ਧਰੇ ਮੈਨ ਕੀ ਸਾਨਨ ਤੋਹੀ ਸੋ ਪ੍ਰੀਤ ਮਹਾ ਹਰ ਕੋ ਇਹ ਬਾਤ ਮੁਰਲੀ ਜਦ ਵੀਰ ਬਜਾਵਤ ਹੈ ਕਬ ਸ਼ਿਆਮ ਕਹੈ ਅਤ ਸੁੰਦਰ ਠੌਰਹਿ ਥਾਹੀ ਤੇ ਤੋਰੇ ਹੋ ਪਾਸ ਪਠੀ ਸੋ ਕਹੋ ਤਿਹ ਲਿਆਵ ਸਜਾਇ ਕੈ ਦੌਰਹਿ ਨਾਚਦ ਹੈ ਜਹਾਂ ਚੰਦਰਪਦਾ ਅਰ ਗਾਇਕ ਹੈ ਗਵਰਨ ਲੇਤ ਹੈ ਭੌਰੈ ਤਾਹੀ ਤੇ 베ਗ ਚਲੋ ਸਜਨੀ ਤੁਮਰੇ ਬਿਨ ਹੀ ਰਸ ਲੂਟ ਤਿਔਰੈ ਤਾਹੀ ਤੇ ਬਾਲ ਬਲਾਏ ਲਿਓ ਤੇਰੀ ਮੈਂ 베ਗ ਚਲੋ ਨੰਦ ਲਾਲ ਬੁਲਾਵੈ ਸ਼ਾਮ ਬਜਾਵਤ ਹੈ ਮੁਰਲੀ ਜਹ ਗਵਰਨ ਆ ਮਿਲ ਮੰਗਲ ਗਾਵੈ ਸੋਰਠ ਸੁਧ ਮਲਾਰ ਬਿਲਾਵਲ ਸ਼ਾਮ ਕਹੈ ਨੰਦ ਲਾਲ ਦੇ ਔਰ ਕੀ ਬਾਤ ਕਾ ਕਹੀਏ ਸੁਰ ਤਿਆਗ ਸਵੇ ਸੁਰ ਮੰਡਲ ਆਵੇ ਰਾਦੇ ਬਾਜ ਪ੍ਰਤੀ ਉਤਰ ਸੋਈਆ ਮੈਂ ਨਾ ਚਲੋ ਸਜਨੀ ਹਰ ਪੈ ਜੋ ਚਲੋ ਤਬ ਮੋਹਿ ਪ੍ਰਿਧ ਨਾਥ ਦੁਹਾਈ ਮੋਹ ਸੰਗ ਪ੍ਰੀਤ ਜੀ ਜਦ ਨੰਦਨ ਚੰਦਰ ਭਗਾ ਸੰਗ ਪ੍ਰੀਤ ਲਗਾਈ ਸ਼ਾਮ ਕੀ ਪ੍ਰੀਤ ਮਹਾ ਤੁੰਸੋ ਤਜ ਮਾਨ ਹਾਰੀ ਚਲੋ ਦੁਜਿਤਾਏ ਤੋਰੇ ਬਿਨਾ ਨਹੀਂ ਖੇਲਤ ਹੈ ਚਹੋ ਖੇਲੋ ਜਾਉ ਪ੍ਰੀਤ ਲਗਾਈ दूती बास होईया पाए परो तुमरे सजनी अति ही मन भीतर मान न कहिया श्याम बुलावत है सो जहा उठ कै ते ठौर बखै चल जइया नाचत है जिम ग्वालनियां नचियै तिम औ ते भांति गईया और अनेक इक बात करो पर राधे बुलाए लियो सो न खइया राधे बास होईया जहौ न हो सुनरी सजनी तोए सी हर ग्वालन कोट पठावै ਮੰਸੀ ਬਜਾਵੇ ਤਹਾ ਤ ਕਹਾ ਹਰਿ ਆਪ ਕਹਾ ਭੈਓ ਮੰਗਰ ਗਾਵੇ ਮੈਂ ਨਾ ਚਲੋ ਤੇ ਠੌਰ ਬਿਖੈ ਬ੍ਰਹਮਾ ਹਮ ਕੋ ਕਹੋ ਆਣ ਸੁਨਾਵੇ ਔਰ ਸਖੀ ਕੀ ਕਹਾ ਗਨਤੀ ਨਹੀਂ ਜਾਓ ਰੀ ਜਾਓ ਹਰਿ ਆਪਨੇ ਆਵੇ ਦੂਤੀ ਬਾਦ ਰਾਦੇ ਸੋ ਸੁਈਆ ਕਾਹੇ ਕੁਮਾਰ ਕਰੈ ਸੰਗਵਾਰ ਵਿੱਚ ਸ਼ਾਮ ਕਹੈ ਉਠ ਕੈ ਜਾ ਕੈ ਕੀਏ ਹੋਏ ਖੁਸੀ ਸੁਨੀਐ ਬਲ ਕਾਜ ਕਰੋ ਅਬ ਜੋ ਤੋਹਿ ਬੋਲ ਪਠਾਵਤ ਹੈ ਜਬ ਪ੍ਰੀਤ ਲਗੀ ਤੂੰ ਸੋ ਤਬ ਕੋ ਨਾ ਕਰ ਰਾਸ ਬਿਖੈ ਸੁਨਰੀ ਤੋਹਿ ਸੀ ਨਹਿ ਗਵਾਰ ਨਸੁੰਦਰ ਕੋ ਸੰਗ ਤੇਰੀ ਹੀ ਪ੍ਰੀਤ ਕਣੀ ਹਰ ਕੀ ਸਭ ਜਾਣਤ ਹੈ ਕਛ ਨਾਹੇ ਨਈ ਜੇ ਕੀ ਮੁਖ ਉਪਮ ਚੰਦ ਪ੍ਰਵਾਦ ਜੇ ਕੀ ਤਨ ਭਾ ਮਨੋ ਰੂਪਮਈ ਤਿਹ ਸੰਗ ਕੋ ਤਿਆਗ ਸੁਨੋ ਸਜਣੀ ਗਰੇ ਕੀ ਉਠਕੇ ਤੋਹਿ ਬਾਟ ਲਈ ਬ੍ਰਿਧਨਾਥ ਕੇ ਸੰਗ ਸਕੀ ਬਹੁ ਤੇਰੀ ਰੀਤੋ ਸੋਗਵਾਰ ਪਈ ਨਾ ਪਈ ਕਬਿਓ ਬਾਸ ਸੁਈਆ ਸੁਨ ਕਹਿ ਇਹ ਕੁਾਰਨ ਕੀ ਪਤਿਆ ਬ੍ਰਿਖ ਭਾਨ ਸੁਤਾ ਮਨ ਕੋ ਹੈ ਕਾਨ ਬਿਨਾ ਪਠੇ ਰੀਤ ਰਿਆ ਹਮਰੇ ਉਨਕੇ ਉਠ ਬੀਚ ਪਈ ਹੈ ਆਈ ਬਨਾ ਹੈ ਹਮ ਕੋ ਸੁ ਕਹੀ ਬਤਿਆ ਜੋ ਨਹੀਂ ਰੁਚਈ ਹੈ ਕੋਪ ਕੈ ਉਤਰ ਦੇਤ ਪਈ ਚਲ ਰੀ ਚਲ ਤੂੰ ਕਿਨ ਬੀਚ ਦਈ ਹੈ ਦੂਤੀ ਬਾਜ ਕਾ ਸੋ ਸਵਈਆ ਕੋਪ ਕੈ ਉੱਤਰ ਦੇਤ ਪਈ ਇਨ ਆਏ ਕਹੋ ਫਿਰ ਸੰਗ ਸੁਜਾਨੈ ਬੈਠ ਰਹੀ ਹੱਠ ਮਾਨ ਤਰੀਆ ਹਉ ਮਨਾਏ ਰਹੀ ਜੜ ਕਿਉ ਹੁ ਨਾ ਮਾਨੈ ਸਾਂਭ ਦੀਏ ਨਾ ਮਨੈ ਨਹੀਂ ਦੰਡ ਮਨੈ ਨਹੀਂ ਪੇਦ ਜੀਏ ਅਰਦਾਨੈ ਐਸੀ ਗੁਵਾਰ ਕਹਾ ਤੂੰਰੀ ਜੋ ਪ੍ਰੀਤ ਕੋ ਰੰਗ ਨਾ ਜਾਣੈ ਮੈਨ ਪ੍ਰਭਾ ਬਾਜ ਕਾਨ ਜੂ ਸੋ ਸਵਈਆ ਮੈਨ ਪ੍ਰਵਾਹ ਹਰਿ ਪਾਸੁ ਤੀ ਸੁਨ ਕੈ ਬਤੀਆ ਤਬ ਬੋਲ ਉਠੀ ਲਿਆਉ ਹਉ ਇਹ ਪਾਂਤ ਕਹਿਓ ਤੁਮ ਤੇ ਹਰਿ ਜੂ ਜੋਗਵਾਰ ਉਠੀਐ ਕਾਨ ਕੇ ਪਾਇਨ ਪੈ ਤਬ ਹੀ ਸੋ ਲਿਆਵਨ ਤਾਹੀ ਕੇ ਕਾਜ ਉਠੀਐ ਸੁੰਦਰਤਾ ਮੁਖ ਉਪਰ ਤੇ ਮਨੋ ਕਾਂਜ ਪ੍ਰਵਾਹ ਸਭ ਵਾਰ ਸੁਟੀਐ ਹਰਿ ਪਾਇਨ ਪੈ ਇਹ ਪਾਂਤ ਕਹਿਓ ਹਰਿ ਜੂ ਉਹ ਕੇ ਢਿਗ ਹਉ ਚਲ ਜੈ ਹੋ ਜਾਹੀ ਉਪਾਅ ਤੇ ਆਇ ਹੈ ਸੁੰਦਰਤਾ ਹੀ ਉਪਾਏ ਮਨਾਏ ਨੇ ਹੋਂ ਪੈ ਬਿੰਤਿ ਕਹਿ ਸੁੰਦਰ ਗਵਾਰ ਮਰੈ ਹੋ ਆਜ ਟਿਗ ਆਨ ਮਿਲੈ ਲਿਆਏ ਬਿਨਾ ਤੁਮਰੀ ਨ ਕਹੈ ਹੋ ਸੋਈਆ ਹਰੇ ਪਾਇਨ ਪੈ ਤੇ ਠੌਰ ਚਨੀ ਕਬ ਸਿਆਮ ਕਹਿ ਫੁਨਮੈਨ ਪ੍ਰਵਾਹ ਜਿਹਕੇ ਨਹੀਂ ਤੁਲ ਮਦੋਦਰ ਹੈ ਜਿਹ ਤੁਲ ਤ੍ਰਿਆ ਨਹੀਂ ਇੰਦ ਸਵਾ ਜੇ ਕੋ ਮੁਖ ਸੁੰਦਰ ਰਾਜਤ ਹੈ ਇਹ ਪਾਤਨ ਨਸੈ ਵਾਕੀ ਕੀ ਅਭਾ ਮਨੋਚੰਦ ਕੁਰੰਗਨ ਕੇ ਹਰਕੀਰ ਪ੍ਰਭਾ ਕੋ ਸਭੋ ਤਨ ਯਾਹਿ ਲਭਾ ਪ੍ਰਤੀ ਉੱਤਰ ਬਾਤ ਸੁਈਆ ਚਲ ਚੰਦ ਮੁਖੀ ਹਰ ਕੇ ਢਿਗਤੇ ਬ੍ਰਿਖ ਪੈ ਚਲ ਆਏ ਕਹਿ ਐਸੇ ਕਹਿਓ ਤੇ ਸੋ ਬਲ ਬੇਗ ਚਲੋ ਨਦ ਲਾਲ ਬੁਲਾਈ ਮੈਂ ਨਾ ਚਲੋ ਹਰੀ ਪਾਸ ਹਾ ਐਸੇ ਕਹਿਓ ਨਾ ਕਰੋ ਦੁਚਿਤਾਈ ਕਾਹੇ ਕੋ ਬੈਠਈ ਠੌਰੂ ਮੈਂ ਮੋਹਨ ਕੋ ਮਨੋਚਿਤ ਚੁਰਾਈ ਜੇ ਕੋਰ ਘਟਾ ਕਨ ਆਏ ਕਨੈ ਚਹੂ ਔਰ ਨੁਐ ਜਹ ਔਰ ਪੁਕਾਰੈ ਨਾਚਤ ਹੈ ਜਹ ਗਵਾਰਨੀਆਂ ਤੇ ਪੇਖ ਕਨੋ ਬਿਰਹੀ ਤਨਵਾਰੈ ਤੌਨ ਸਮੈ ਜਦ ਸੁਨੋ ਮੁਰਲੀ ਕੋ ਵਜਾਏ ਕਹਿ ਤੋਹਿ ਚਿਤਾਰੈ ਕਾਹੀ ਤੇ ਬੇਗ ਚਲੋ ਸਜਨੀ ਤਿਹ ਕੌਤਕ ਕੋ ਹਮ ਜਾਏ ਨਿਹਾਰੈ ਸੋਈਆ ਤਾਤਿ ਨਾ ਮਾਨ ਕਰੋ ਸਜਨੀ ਹਰਿ ਪਾਸ ਚਲੋ ਨਹਿ ਸੰਕ ਵਿਚਾਰੋ ਬਾਤ ਧਰੋ ਰਸ ਕੀ ਮਨੈ ਆਪਣੇ ਮਨ ਮੈ ਨਾ ਕਛੂ ਹਟ ਤਾਰੋ ਕੌਤਕ ਕਾਨ ਕੋ ਦੇਖਣ ਕੋ ਤੇਹ ਕੋ ਜਸ ਪੈ ਕਵ ਸ਼ਾਮ ਉਚਾਰੋ ਕਾਹੇ ਕੋ ਬੈਠ ਰਹੀ ਹਟ ਕੇ ਕਹੋ ਦੇਖਣ ਕੋ ਮਨਸਾਰੋ ਹਰਿ ਪਾਸ ਨਾ ਮੈਂ ਚਲੋ ਸਜਨੀ ਪਿਖ ਕਹੋ ਕੌਤਕ ਜੀ ਨਾ ਮੇਰੋ श्याम रचे संग और त्रिया तज कै हम सो पुन नेक नेरो चंद्र पगाहू के संग कहो नह नारी कहा मोहे नैनन नह हेरो ताते न पास चलो हरि हो उठ जाहे जो उमग्यो मन तेरो